चलोक महला ਮਹੱਲਾ ਤੀਜਾ ਇਹਾ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਇਹਾ ਸੰਧਿਆ ਪ੍ਰਵਾਨ ਹੈ ਸਤਿਆ ਮੈਂ ਲੋਏ ਟਾਂ ਬਿਲ ਲੋ ਅਕਲ ਦੇ ਸੰਧਿਆ ਸੂਰਜ ਦਾ ਡੁੱਬਣਾ ਛਪਣ ਦੀ ਗੱਲ ਨਹੀਂ ਹੈ ਬੰਦਾ ਡੁੱਬ ਜਾਣਾ ਚਿਤ ਦੇ ਵਿੱਚ ਹੀ ਇਹ ਸੀ ਸੁਦੇਆ ਦਰਗਾਹ ਪ੍ਰਵਾਨ ਜਦੋਂ ਹਰ ਪ੍ਰਭ 베ਰਾ ਚਿਤ ਆਵੇ ਹਰ ਕੇ ਸਮਾਜਵੇ ਉਹਦਾ ਹੀ ਰੂਪ ਹੋ ਜਵੇ ਆਪਣੇ ਵਰਜੀ ਤਿਆਗ ਦੇ 베ਰਾ ਦੁਰਮੁਦਿ ਹੋ ਜਾਏ ਇੱਕ ਤਾਂ ਸੁਦੇਆ ਵਾਸਤੇ ਇਹ ਪ੍ਰਵਾਨ ਦਰਗਾਹ ਹੋ ਗਈ ਸਭ ਇਹਨੇ ਕਹੇ ਕਿ ਕਾਗਜ਼ ਉੱਥੇ ਚਲੇ ਗਏ ਸੰਧਿਆ ਹੋ ਗਈ ਠੀਕ ਹੈ ਜੀ ਹਰਸਿਓ ਪ੍ਰੀਤ ਉਪਜਿਆ ਮਾਇਆ ਮੋਹ ਜਲਾਵੈ ਹਰ ਬਿਨਾਂ ਪ੍ਰੀਤ ਪੈਦਾ ਜਾਂਦੀ ਹੈ ਮਾਇਆ ਮੋ ਚੰਦਰ ਇਹ ਸੰਦੇਅ ਦੀ ਡੈਫੀਨੇਸ਼ਨ ਹੈ ਦੋ ਚੀਜ਼ਾਂ ਦੇ ਮਿਲ ਆਪਾਂ ਸੰਦੇ ਸੁੱਧੀ ਹੋ ਗਈ ਆਪਾਂ ਕਹਿੰਦੇ ਨੇ ਹੋ ਗਈ ਦੋ ਤਾਂ ਇੱਕ ਹੋ ਜਾਣ ਹਾਂਜੀ ਜੁਆਇ ਤੇ ਇੱਕ ਰੂਪ ਹੋ ਗਏ ਇੱਕ ਹੋ ਗਏ ਹਰੂ ਇੱਕ ਹੋਵੇ ਉਹ ਕੀ ਇੱਕ ਹੋਵੇ ਤਾਂ ਉਹ ਉਪਰ ਉਕਰੋ ਕੀ ਹੈ ਸੰਧਿਆ ਹੋਗੀ। ਆਮ ਸੰਧਿਆ ਕਰਦੇ ਆਂ ਪੜ ਪੁਸਤਕ ਬਾਰੇ ਐਂ ਲਿਖਿਆ ਗੁਰ ਦੁਬਦਾ ਮਰੇ ਮਨੁਆ ਸੰਧਿਆ ਕਰੇ ਵਿਚਾਰ। ਹਰ ਸਿਓ ਪ੍ਰੀਤ ਉਪਜੈ ਮਾਇਆ ਮੋਹ ਜਲਾਵ ਚਲੋ ਗਿਆਨ ਪ੍ਰਚੰਡ ਹੁੰਦਾ ਤਾਂ ਮਾਇਆ ਮੋਹ ਜੜ ਜਾਂਦੀ ਕੀ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਪ੍ਰਚੰਡ ਦਾ ਗਿਆਨ ਮਾਇਆ ਮੋਹ ਜੜ ਜਾਂਦਾ ਮਰੈ ਮਨੁਵਾਂ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਮਰ ਜੰਮੈ ਹੋਏ ਖੁਆਰ ਗੁਰ ਪ੍ਰਸਾਦੀ ਦੁਬਿਦਾ ਜਾਂਦੀ ਦਰਪਾਨਾ ਦੁਬਦਾ ਬੜ ਜਾਂਦੀ ਹੈ ਦੋਨੀਆਂ ਦੇ ਇੱਕੋ ਰਹ ਜਾਂਦੇ ਦੋ ਪਾਸੇ ਦੀ ਦੌੜ ਬਾਇਆ ਦੀ ਵੀ ਭੁੱਖ ਹੈ ਦੂਜੀ ਵੀ ਭੁੱਖ ਹੈ ਖਤਮ ਨਹੀਂ ਹੋਣੀ ਬਨਵਾ ਅਸਰ ਸੰਧਿਆ ਕਰੇ ਵਿਚਾਰ ਅਸਰ ਹੋ ਗਏ ਤੇ ਵਿਚਾਰ ਤੱਤ ਸੰਧਿਆ ਦੀ ਵੀ ਸੰਧਿਆ ਕਿੰਨਾ 라ਵ ਹੈ ਸੰਧਿਆ ਦੀ ਖੁਸ਼ੀ ਹੈ ਸੰਧਿਆ ਨੂੰ ਕਿੰਨਾ ਸੁੱਖ ਹੈ ਉਹ ਚੰਨਾਂ ਨੀ ਵਿਚਾਰ ਕਰਦਾ ਜਿਹੜੀ ਚੀਜ਼ ਨੂੰ ਪਾ ਦਦਾ ਤਾਂ ਉਹ ਹੈ ਸਾਡੀ ਦੁੱਖਾਂ ਦਾ ਮੇਰੀ ਮਰਦੀ ਸੀ ਸੀ ਛੱਡਦਾ ਸਾਰਾ ਕਾਲੇ ਕਲਪਣਾਂ ਸੀ ਬੇਰੀ ਫਿਰ ਵਿਚਾਰ ਕਰਦਾ ਠੀਕ ਹੈ ਜੀ ਨਾਨਕ ਸੰਧਿਆ ਕਰੈ ਮਨਮੁਖੀ ਜੀਓ ਨਾ ਟਿਕੈ ਮਰ ਜੰਮੈ ਹੋਏ ਖੁਆਰ ਪਰ ਵੀ ਲੋਕ ਵੀ ਸੰਧਿਆ ਕਰਦੇ ਨੇ ਜਿਵੇਂ ਤੁਸੀਂ ਉਹ ਵੀ ਸੰਧਿਆ ਕਰਦੇ ਸੰਦੇ ਆਵੇ ਪਾੜ ਪੜਦੇ ਸੰਦੀ ਉਹ ਜਾਵਦੇ ਨੇ ਪਰ ਕੋਈ ਆਲੇ ਨੇ ਨਾ ਦੌਰ ਖਿਆ ਦੇਦਾ ਉਹ ਬਹੁਤ ਭੁੱਖੀ ਸਦਿਆ ਕਰਦੇ ਨੇ ਪਰ ਤਾਵਾ ਵੀ ਰੋਦੀ ਸੰਦੇ ਆਵੇ ਬਹੁਤ ਭੁੱਖੀ ਦਿਓ ਦੱਟੇ ਕਰ ਤਰੋ ਹੈ ਨਹੀਂ ਪਰ ਜਦ ਦੇ ਖੋ ਜਮੜ ਬੰਦ ਤੇ ਖਾਣੀ ਕੇ ਸੰਦੇ ਅਸਲ ਤੇ ਆਈ ਫਰਕਾ ਜਦੋਂ ਸੰਦੇ ਆਈ ਹੈ ਇੱਕ ਸੰਦੇ ਅਰਥ ਕੀ ਹੈ ਇੱਕ ਸੰਦੇ ਅਦਾਲਤ ਕੀ ਹੈ ਸੰਦੇਆ ਅਸਲੀ ਵੀ ਸੰਦੇਆ ਲਖਲੀ ਬਣ ਜਾਂਦੀ ਕਰੀ ਜਾਓ ਕਛਲੀ ਦੇ ਨਾਲ ਠੀਕ ਹੈ ਜੀ ਸੰਦੇਆ ਵੀ ਕੀ ਬਣ ਬਣੀ ਇਹ ਆਪਣੀ ਮਰਜ਼ੀ ਠੀਕ ਇੱਕ ਗੁਰਮੁਖੀ ਸੰਦੇਆ ਇੱਕ ਮੰਨੁਖੀ ਆਪਣੇ ਆਪ ਵਿੱਚ ਬੁਰਾਉ ਤਾਂ ਲਿਆਉਣਾ ਸੀ ਸੰਦੇਆ ਖਾਲਦੀ ਲੋਕਾਂ ਨੂੰ ਦੱਸਣੇ ਤੇ ਧਰਮ ਵੀ ਵਾਸਤੇ ਧਰਮ ਕਰਨਾ ਹੁੰਦਾ ਲੋਕਾਂ ਨੂੰ ਦਿਖਾਵੇ ਵਾਸਤੇ ਨਹੀਂ जिन्होंने लोकां ने लोकां दिखावे वास्ते गर्व कीता ओले कुछ दिखाके आछ जिन्हों लोकां ने अपने वास्ते गर्व कीता सुनाया उनारो इशो करे परम रूद्ध हो हां जी मोहल्ला तीजा प्रियो प्रियो करती सब जग फिरी मेरी प्यास न जाए नानक प्यास गई फिर पाया घर आई ਇਹ ਤੇ ਮਾਂ ਦੀ ਗੱਲ ਸਾਰੇ ਜੱਗ ਚ ਕੋਈ ਨਹੀਂ ਤਰੇ ਪ੍ਰਿਓ ਪ੍ਰਿਓ ਗਲਤੀ ਕੋਈ ਪਿਆਰ ਭੁਜਾ ਦਵੇ ਕਿੰਨੇ ਚੱਕਰ ਲਾਏ ਹੰਦਵਾਸ ਦੇ ਖਬਰੇ ਕਿਦੂ ਕਿਦੂ ਚੀਕੇ ਗੀਦੇ ਨਾਲ ਮਲਾਪ ਹੋਇਆ ਹੁਣ ਕਿਦੂ ਕਿਦੂ ਪੁੱਛਿਆ ਹੁਣ ਸਭ ਜੱਗ ਫੇਰੀ ਹਿਸਤੀ ਦੱਸੀ ਆਪਣੀਆਂ ਨੇ ਕਿ ਤਾ ਰਸੇ ਮੇਰੀ ਪਿਆਸ ਨਾ ਜਾਏ ਮੇਰੀ ਪਿਆਸ ਨਾ ਜਾਏ ਪਰ ਪਿਆਸ ਕਿਸੇ ਨੇ ਠੋਡੀ ਦੱਸੀ ਪਾਲੀ ਨਹੀਂ ਉਬਰਦੀ ਭੁੱਖ ਕਿਸੇ ਤੋਂ ਨਹੀਂ ਭਰੀ ਪਿਆਸ ਲਈ ਪਿਆਸ ਨਾਨਕ ਸਤਗੁਰ ਮਿਲਿਆ ਮੇਰੀ ਘਰ ਆਈ ਜਦ ਦਾ ਮਿਲਿਆ ਤੇ ਪਿਆਸ ਧਰੀ ਚਲੀ ਗਈ ਸਰ ਰੈਣ ਰਣ ਬਨਾਪ ਹੋਇਆ ਪਿਆਸ ਸਾਰੀ ਚਲੀ ਗਈ ਫਿਰ ਉਹਨਾਂ ਨੇ ਵੀ ਆਪ ਲਿਖੀ ਨਦ ਹੁੰਦਾ ਸੀ ਇਹ ਸਾਰੀ ਕਹਾਣੀ ਲਿਖੀ ਸਤਗੁਰ ਮਿਲਿਆ ਬੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਆਪਣੇ ਘਰ ਆਏ ਸੱਚ ਕਰਨ ਚਲੇ ਗਏ ਵਾਪਸ ਆਏ ਲਫਜ਼ ਐ ਇੱਥੋਂ ਗਏ ਸੁੰਦਰਾਂ ਦੇ ਪਾਲਿਆ ਆਪਣੀ ਬਾਤ ਰਵੇ ਆ ਸੰਸਾਰ ਚੋਰੀ ਪਾਇਆ ਬਾਲਮੁਖੀ ਕੌਣ ਰਹੇ ਬਾਲਮੁਖੀ ਗੋਣ ਕਿੱਥੇ ਸੀ ਬਾਲਮੁਖੀ ਦਾ ਅਦਰ ਸਾਧਰ ਕੇ ਰਹੇ ਨਾਲੇ ਲੋਕ ਵੀ ਇਹ ਜਿੰਨੇ ਬਾਲਮੁਖੀ ਗਿਆਨ ਦੇ ਵਾਲੇ ਵੀ ਖੋਦ ਅਦਰ ਸਾਧਰ ਦੇ ਪਿੱਛੇ ਦੇ ਇਹਨਾਂ ਕੋਲ ਕੀ ਐ ਤਾਂ ਦੇ ਵਿਅਕਤੀ ਦੇ ਵਿੱਚ ਇਹਨਾਂ ਨੇ ਕੀ ਦੇ ਦੇ ਇਹਨਾਂ ਕੋਲ ਤਾਂ ਗੱਲਾਂ ਨੇ ਜਿਹਨਾਂ ਨੇ ਆਪੇ ਆਪੇ ਠਾਕੁਰ ਦਾਸ ਭਾਇਆ ਆਪੇ 10 8 ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਇੱਥੇ ਤਤ ਹੋਣਾ ਚਾਹੀਦਾ ਆਪੇ ਤਤ ਆਪੇ ਤਤ ਹੀ ਤੰਤ ਚਾਹੀਦਾ ਉੱਪਰ ਹਾਂਜੀ ਤੰਤ ਨੂੰ ਬਜਾਉਣ ਵਾਲੀ ਜੰਤ ਬਜਾਉਣ ਵਾਲੀ ਚੀਜ਼ ਪਰਮ ਤੱਤ ਪਰਮ ਤੱਤ ਤੰਤ ਉਤਪੰਨ ਹੈ ਜਿਵੇਂ ਪਾਣੀ ਤੋਂ ਲਹਿਰ ਬਣਦੀ ਹੈ ਤੰਤ ਤਾਂ ਲਹਿਰ ਰੂਪ ਹੈ ਲਹਿਰ ਉੱਪਰ ਹੋਈ ਚੀਜ਼ ਹੈ ਠੀਕ ਹੈ ਜੀ ਤੰਤ ਦੇ ਦੋ ਰੂਪ ਨੇ ਤੰਤ ਦੇ ਦੋ ਰੂਪ ਤਾਂ ਨੇ ਇੱਕ ਲਹਿਰ ਹੈ ਇੱਕ ਪਾਣੀ ਹੈ ਪਰ ਫਿਰ ਤਾਂ ਆਪੇ ਤੱਤ ਵੀ ਹੋ ਸਕਦਾ ਆਪੇ ਤੱਤ ਪਰਮ ਤੱਤ ਸਭ ਆਪੇ ਠੀਕ ਨਹੀਂ ਹਾਂ। ਤੇ ਕੀ ਪੜਾਂਗੇ? ਅੱਜ ਤਤ ਦੀ ਬਜਾਏ ਤਤ ਬਾਰੇ ਅੱਛਾ ਆਪੇ ਤਤ ਪਰਮ ਤਤ ਆਪੇ ਆਪੇ ਠਾਕੁਰ ਦਾਸ ਪਿਆ। ਗੁਰੂ ਜੀ ਸਾਹਿਬ ਦੀ ਹੱਥ ਲਿਖਤਾਂ ਨੇ ਜੀ। ਹਾਂਜੀ। ਉਹ ਦਾ ਰਵਾਜ ਨਹੀਂ ਸੀ ਬਿਲਕੁਲ ਵੀ। ਦੋਵੇਂ ਧਾਮਾਂ ਟਿੱਪੀਆਂ ਦਲਤ ਲੱਗੀਆਂ ਲੱਗਦੀਆਂ ਬਦੂ। ਹਾਂਜੀ ਟਿੱਪੀਆਂ ਜ਼ਿਆਦਾ ਲੱਗੀਆਂ ਹੋਈਆਂ ਆਪਣੇ ਕੋਲੋਂ ਲਾਈਆਂ। ਉਸਗਰ ਗਲਤੀ ਹੋ ਗਈ ਆਪਣੇ ਕੋਲ ਆਈਆਂ ਬਾਅਦ ਦੇ ਵਿੱਚ ਇਹ ਬਾਅਦ ਲੱਗੀ ਹੋਈ ਹੈ ਤੱਕ ਲੱਗਿਆ ਹੈ ਆਪੇ ਤੱਕ ਪਰਮ ਤੱਕ ਆਪੇ ਆਪੇ ਤੱਕ ਆਪੇ ਪਰਮ ਤੱਕ ਪਰਮ ਤੱਕ ਸਾਗਰ ਰੂਪ ਠੀਕ ਹੈ ਤੱਕ ਬੂਧ ਦੇ ਰੂਪ ਤੇ ਰੂਪ ਤੇ ਪੰਨਾ 597 ਤੇ ਤੰਤ ਕੋ ਪਰਮ ਤੰਤ ਮਿਲਾਇਆ ਇਹ ਪਤਾ ਨਹੀਂ ਉੱਥੇ ਵੀ ਗਲਤੀ ਹੈ ਤੰਤ ਦੇ ਕੋ ਜੂਤ ਹੈ ਤੰਤ ਕੋਈ ਸਾਜ ਹੈ ਇਹ ਤਾਂ ਸਾਜ ਹੈ ਤਤ ਤੰਤ ਠੀਕ ਹੈ ਜੀ ਇਸ ਤਰ੍ਹਾਂ ਹੀ ਜਦੋਂ ਆਪਾਂ ਪੜਦੇ ਆਂ ਤੰਤ ਪਰਮ ਤੰਤ ਮਿਲਿਆ ਨਾਨਕ ਬੁੱਧੀ ਪਾਈ ਨਹੀਂ ਪਰਮ ਤਤਮ ਹੈ ਰੇਖ ਨਾ ਰੂਪ ਪਰਮ ਤਤ ਇਹ ਮੈਂ ਲੱਬੇ ਟਿੱਪੀ ਗਲਤੀ ਨਾਲ ਲੱਗੀ ਹੋਈ ਹੈ ਅਪਾ ਆ ਤੀਨ ਨੂੰ ਦੀ ਪਤਾ ਨਹੀਂ ਉਹਨਾਂ ਨੇ ਨਮਾਜ਼ ਕੀ ਆਇਆ ਕੀ ਚਾਹੀਏ ਕੀ ਚਾਹੀਏ ਮਤਲਬ ਇਹਨਾਂ ਦੇ ਦਰਾਂ ਦੀ ਗੱਲ ਸਭੀ ਤੋਂ ਬਾਹਰ ਹੈ ਕਿਹਾ ਜਿਹੜੇ ਉਹਨਾਂ ਨੇ ਗਲਤ ਪੜ੍ਹਿਆ ਉਹਨੇ ਦੇਰ ਪੜ੍ਹਿਆ ਉਹਨਾਂ ਦਾ ਹੋਊਗੀ ਜੇ ਗਲਤੀ ਉਹਨਾਂ ਦੀ ਉਹ ਤਾਂ ਦਿਸ਼ਾ ਹੀ ਗਲਤ ਆ ਉਹਦੀ ਉੱਥੇ ਉਹਨਾਂ ਨੇ ਉੱਥੇ ਜਾ ਕੇ ਇੱਥੇ ਜਾਰੇ ਇਹ ਬਹੁਤ ਜਗ੍ਹਾ ਜਿੱਥੇ ਆਉਂਦਾ ਨਾ ਜੀ ਅਖਰਤੰਤ ਉੱਥੇ ਤੰਤਰ ਵਾਸਤੇ ਆਉਂਦਾ ਪੈਰ ਚ ਲਿਖਿਆ ਹੋਇਆ ਔਖਦ ਮੰਤਰ ਤੰਤ ਸਾਰ ਉਥੋਂ ਸਭ ਛਾਰ ਪੈਰ ਚਾਹੀਦਾ ਹਾਂ ਉੱਥੇ ਚਾਹੀਦਾ ਕਿਉਂਕਿ ਜਦ ਮੰਤਰ ਸਬਾਸ਼ਿਨਿਸ ਨੀ ਲਿਖਾ ਠੀਕ ਹੈ ਜੀ ਇੱਕ ਹੋਰ ਹੈਗਾ ਜੀ ਆਸਾ ਭਗਤ ਕਬੀਰ ਜੀ ਉਹ ਤੰਤਰ ਮੰਤਰ ਸਭ ਔਖੇ ਜਾਣੇ ਇੱਥੇ ਵੀ ਤੰਤਰ ਨੇ ਲਿਖਿਆ ਤੰਤ ਤੇ ਲਿਖਿਆ ਹੋਇਆ ਪੈਰ ਦਾ ਰਾਰਾ ਫਿਰ ਵੀ ਕਹਿਣ ਦਾ ਮਤਲਬ ਹੈ ਦਾ ਰਾਰਾ ਬਿੜਿਆ ਯਾਰ ਬਿੜਿਆ ਤੰਤ ਉਹਦਾ ਸੈਕੰਡ ਰੂਪ ਹੈ ਹਾਂਜੀ ਮੂਲ ਤੱਤ ਹੈ ਮੂਲ ਤੱਤ ਤੱਤ ਬੁਲਾਇਆ ਜੀ ਇਹ ਜਿਹੜੇ ਸ਼ਬਦਾਰਥ ਵਾਲੇ ਆ ਉਹਨਾਂ ਨੇ ਵੀ ਐਵੇਂ ਲਿਖਿਆ ਹੈ ਹਰੀ ਆਪ ਹੀ ਤਤ ਵਸਤੂ ਹੈ ਤੇ ਆਪ ਹੀ ਸਭ ਤਤਾਂ ਦਾ ਤਤ है ਆਪੇ ਤਤ ਪਰਮ ਤਤ ਆਪੇ ਦੇਖੋ ਸਮਝੋ ਕੀ ਹੈ ਬਾਹਿਆ ਦੇ ਵਿੱਚ ਵੀ ਆਪੇ ਆਉ ਉਹ ਜਿਹੜੇ ਪਰਮ ਤਤ ਵੀ ਆਪੇ ਬਾਹਿਆ ਉਹ ਤੋਂ ਭਿੱਜ ਰਹੀ ਹੈ ਚੇਤਨ ਪਰਬ ਤੱਤਾ ਚੇਤਨ ਨੂੰ ਪਰਬ ਤੱਤਾ ਕਿਹਾ ਤੱਤੇ ਤੱਕ ਮੰਗਾਵ ਹੋਏ ਤੱਤ ਤਾਂ ਹਰ ਜਗ ਅਤੱਤਾ ਹੈ ਤੱਤ ਤੇ ਆਇਆ ਹੀ ਨਹੀਂ ਕੋਈ ਜਿੱਥੇ ਵੀ ਤੰਤ ਆਉਂਦਾ ਨਾ ਜਿੱਥੇ ਗਲਤੀ ਲੱਗਦੀ ਹੈ ਹਾਂ ਉਹ ਸਾਜ ਦੇਣਾ ਦੋ ਤਿੰਨ ਪੰਕਤੀਆਂ ਸ਼ੋਚੀ ਨਲੀ ਤੰਤ ਨਹੀਂ ਨਿਕਸੈ ਠੀਕ ਹੈ ਜੀ ਇਸ ਤਾਈਂ ਹੱਥ ਸਿਕਰ ਤੰਤ ਵਜਾਵੇ ਜੋਗੀ ਥੋਥਰ ਵਾਜੇ ਬੀਣ ਇੱਥੇ ਵੀ ਤੰਤ ਠੀਕ ਹੁੰਦਾ ਨਾ ਬਜੇ ਰਵਾਬ ਇਹ ਵੀ ਠੀਕ ਹੈ ਜੀ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ ਸੋ ਇੱਥੇ ਜੀ ਉਹਨਾਂ ਨੇ ਗਲਤੀ ਨਾਲ ਟਿੱਪੀ ਲੱਗੀ ਆ ਵੈਸੇ ਹੋਣਾ ਚਾਹੀਦਾ ਆਪੇ ਤਤ ਪਰਮ ਤਤ ਆਪੇ ਆਪੇ ਠਾਕੁਰ ਬਿਲਕੁਲ ਅਬ ਲਿਆ ਹੁਣ ਤੁਸੀਂ ਸਾਰਾ ਹੀ ਲਬ ਲਿਆ ਤਸੱਲੀ ਹੋ ਗਈ ਹਾਂਜੀ ਵੀ ਇਹ ਗਲਤੀ ਹੋਈ ਖੋਜ ਹੋਵੇ ਤਸੱਲੀ ਹੋ ਜਾਂਦੀ ਸਾਡੇ ਕੋਲ ਸਭ ਕੁਝ ਪਿਆ ਹਾਂਜੀ ਆਪੇ ਠਾਕੁਰ ਪਿਆ ਉਹ ਜਿਹੜਾ ਧਾਰੋ ਵੀਰਾਂ ਪਹਿਲਾਂ ਧਾਰੋ ਇਹਨਾਂ ਸੀ ਕਹਿੰਦੇ ਤੇ ਹੋ ਗਿਆ ਉਹ ਵੱਡਾ ਅੱਛਾ ਜੀ ਧਾਰੋ ਇਹ ਨੁੱਬੇ ਇਹ ਨੂੰ ਗੰਦ ਕੈ ਨਾ ਸੀ ਠਾਕੁਰ ਘਰ ਵਿੱਚ ਨਜ਼ਰ ਅਸਲ ਜੋ ਦਾ ਮਿਲਿਆ ਬਾਬਾ ਉਹਦਾ ਬਾਪ ਮਿਲਿਆ ਉਹ ਨੂੰ ਕਹਿੰਦੇ ਠਾਕੁਰ ਉਹਦਾ ਦਾਸ ਹੋ ਗਿਆ ਠੀਕ ਹੈ ਜੀ ਆਪੇ 10 8 ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਜਿਹੜੇ ਛਾਰਾ ਭਾਣ ਪੈਦਾ ਕੀਤਾ ਛਾਰਾ ਭਾਣ ਕੀ ਤੇ ਪੈ ਆਪੇ ਪੈਦਾ ਕੀਤਾ ਲੈ ਗਦਰ ਦੇ ਅਵੀ ਸਾਰੀਓ 18 ਪ੍ਰਾਣ ਦੇ ਵਿੱਚ ਅੱਛਾ ਆਪੇ ਦਾਖਾ ਕੇ ਵਰਣ ਨੂੰ ਪਾਏ ਵਰਣ ਵਰਣ ਨੂੰ ਪਾਏ ਆਪ ਬ੍ਰਹਮ ਵਰਣ ਹੈ ਇਹ ਥਾਲਾਂ ਵਰਣ ਨੇ ਪ੍ਰਾਣ ਸੀ ਉਹੀ ਥਲੇ ਪੈਦਾ ਹੋ ਗਏ ਸੀ ਇੱਕ ਇੱਕ ਪ੍ਰਾਣ ਦੇ ਜਿਹੜੇ ਅਲੱਗ-ਅਲੱਗ ਜਿਹਨੂੰ ਰਾਜਾ ਖਾ ਹਾਂਜੀ ਅਜੇ ਬੈਦਾਂ ਜਨੇ ਵਰਲ ਦੇ ਕੋਈ ਕਸੇ ਦੀ ਬੋਲਿਆ ਕੋਈ ਕਸੇ ਦੀ ਬੋਲਿਆ ਵਰਲ ਦੇ ਵਰਲ ਤਾਂ ਆਈ ਹੁੰਦਾ ਹੋਰ ਕੁਛ ਨਹੀਂ ਹੁੰਦਾ ਠੀਕ ਹੈ ਜੀ ਆਪੇ ਆਪ ਰਾਜ ਲੈ ਬ੍ਰਹਮ ਬਣ ਗਿਆ ਫਿਰ ਰਾਜ ਲੈ ਲਿਆ ਠੀਕ ਹੈ ਜੀ ਬ੍ਰਹਮ ਨੂੰ ਵੱਡਾ ਬਣਾਇਆ 18 ਦੇ ਬ੍ਰਹਮ ਬ੍ਰਹਮ ਨੂੰ ਵੱਡਾ ਬੁਦੀ ਬ੍ਰਹਮ ਦੀ ਵਖਿਆ ਦਿੱਤੀ ਬ੍ਰਹਮ ਦੀ ਵਿਆਖਿਆ ਦਿੱਤੀ 18 ਦੇ ਅੱਛਾ ਦੇਤ ਤੋਂ ਰਾਜ ਨਹੀਂ ਹੋਇਆ ਰੇਸ ਲਈ ਦੇਸ ਦੀ ਬਰਾਬਰੀ ਨਹੀਂ ਕੀਤੀ ਬੰਦ ਦੀ ਬਰਾਬਰੀ ਨਹੀਂ ਕੀਤੀ ਆਪ ਰਾਜ ਲਿਆ ਸਹੀ ਠੀਕ ਹੈ ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੇ ਦਇਆ ਤੇ ਪਰਮੇਸ਼ਰ ਆਪੇ ਮਾਰਦਾ ਆਪੇ ਬਖਸ਼ਦਾ ਆਪੇ ਕਰਨਦਾ ਆਪੇ ਦਇਆ ਕਰਦਾ ਫਿਰ ਹੁਣ ਪਰਮੇਸ਼ਰ ਦੀ ਗੱਲ ਸ਼ੁਰੂ ਹੋਗੀ ਜੀ ਕਰਦੇ ਅਸੀਂ ਕਰਾਉਣਾ ਤਾਂ ਉਹ ਹੈ ਅੱਛਾ ਜੀ ਕਰਾਉਣ ਫੜ ਲਿਆ ਹੁਣ ਆਪਾਂ ਪਤਾ ਮਾਹਲਾ ਜਿੰਨਦਰ ਸਾਡੇ ਵਾਸੀ ਗੱਲ ਜੀ ਮਾਹਲਾ ਜਿੰਨ ਵਾਸੀ ਸਾਡੇ ਹੀ ਆ ਗੱਲ ਪਰ ਪਿੱਛੇ ਉਹ ਖੜਾ ਹੈ ਆਪੇ ਬਾਰੇ ਆਪੇ ਛੋੜੇ ਆਪੇ ਬਖਸ਼ੇ ਖੜੇ ਹੁਣ ਆ ਆਪਸੰਦ ਹੀ ਖੜਦੇ ਆ ਕਿੰਸ ਆਦਮੀ ਦੂਰ ਅਸੀਂ ਪੂਰੇ ਨਹੀਂ ਕਰ ਸਕਦੇ ਹੁਣ ਉਹਨਾਂ ਨੂੰ ਜਿਹੜਾ ਲੁਕਿਆ ਖੜਾ ਪਿੱਛੇ ਹੁਣ ਤੇ ਤਾਂ ਰੱਖਿਆ ਹੁਣ ਲਗੋਇਆ ਲਿਆ ਜਾ ਸਕਦਾ आप ਓ ना ਨਾ कभी, ਕਬਹੀ ਸਭ ਸੱਚ ਤਪਾਵਸ ਸੱਚ ਥਿਆ ਆਪ ਓ ਭੁੱਲ ਭੁੱਲਾ ਆਪੇ ਜਿਨ੍ਹਾਂ ਬੁਝਾਏ ਗੁਰਮੁਖੀ ਤਿਨ ਅੰਦਰੋਂ ਦੂਜਾ ਭਰਮ ਗਿਆ। ਜੀ ਰਾਮ ਪ੍ਰਭੂ ਖਾ ਨੂੰ ਬੁਝਾਤਾ ਪਰਮ ਜੇਵਨ ਦਾ ਪਰਮ ਚੱਕਿਆ। ਜੇਵਨ ਦਾ ਜਿਹੜਾ ਠੀਕ ਹੈ ਦੀ ਗੱਲ ਹੈ ਦੁਬਾਰਾ ਜੀਵ ਦੀ ਉਹ ਗੱਲ ਜੀਵ ਦੇ ਮਾਮਲੇ। ਨੇ ਕਿਰਪਾ ਕਰਕੇ ਹੋ ਗਿਆ। ਕਬੂ ਜੀ ਆ ਗਈ ਠੀਕ ਹੁਕਮ ਦੀ ਬੁੱਝ ਲਿਆ ਉਹ ਕਬੂ ਲਿਆ ਨਾ ਠੀਕ ਹੈ ਲਿਆ ਅਗਰ ਹੁਕਮ ਜੀ ਦਰ ਦੇ ਤਾਏ ਵੀ ਹੁਕਮ ਰਹੀ ਬਾਰੇ ਉਹ ਵੀ ਹੁਕਮ ਸੀ ਪਚਾਇਆ ਉਹ ਵੀ ਹੁਕਮ ਸੀ ਸੋ ਕਬੂ ਲਿਆ ਠੀਕ ਹੈ ਹਾਂ ਜੀ ਇੱਥੇ ਹੈ ਜੀ ਹਾਂ